ਬਿਲਾਵਲ की ਵਾਰ मोहल्ला चौथा ਇਕ ओंकार सतगुरु प्रसाद श्लोक मोहल्ला चौथा हर उत्तम हरप्रभु गावेआ कर्णाद बिलावल राग उपदेश गुरु सुन मनन्या तुर मस्तक पूरा भाग हां जी हर उत्तम हरप्रभु गातेआ कर्णाद बिलावल राग तमै पर प्रभु आर्य हर प्रभु तो गल गाया भावे कि नहीं गाया कतु पाया कि सिर्फ हसत दिखाया जांदा है करनाथ ब्लावर राज जब नाथंदन हद पर प्रकट होया संत गुरु फिर गाया गया ये नाल ब्लावर राज वो जब बड़ा बुलाया बोलदा वो बुलाया बोलदा तां ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਉਪਦੇਸ਼ ਜੋ ਗੁਰੂ ਦਾ ਹੈ ਜੋ ਸ਼ਬਦ ਗੁਰੂ ਦਾ ਬੇਸ ਹੈ ਪਰ ਸੁਣਿਆ ਤੇ ਫਿਰ ਮੰਨਿਆ ਤੁਰ ਮਸਤਕ ਪੂਰਾ ਭਾਗ ਇਹਨੇ ਮੰਨਿਆ ਉਹਨਾਂ ਤੁਰ ਮਸਤਕ ਭਾਗ ਪੂਰੇ ਸੰਗ ਪੂਰੇ ਭਾਗ ਨੇ ਦਰਗਾਹ ਵਿੱਚ ਮੈਂ ਜਾਂਦੇ ਨੇ ਤੇ ਪੂਰੇ ਭਾਗ ਦੀ ਮੰਨ ਲਿਆ ਫਿਰ ਦਰਗਾਹ ਕੇ ਉਹਦੇ ਪੂਰੇ ਭਾਗ ਮੰਨ ਜਾਂਦੇ ਨੇ ਦਰਗਾਹ ਵਿੱਚ ਆ ਨਹੀਂ ਜਾਂਦੇ ਹੁਣ ਦਰਗਾਹ ਜੋ ਪੂਰੇ ਭਾਗ ਮੰਨ ਜਾਂਦੇ ਠੀਕ ਹੈ ਸੁਣਿਆ ਕਿੱਥੋਂ ਜੀ ਉਪਦੇਸ਼ ਗੁਰੂ ਸੁਣ ਪਹਿਲਾਂ ਸੁਣਿਆ ਫਿਰ ਮੰਨਿਆ ਸੁਣਿਆ ਕਿੱਥੋਂ ਜੀ ਪਹਿਲਾਂ ਤਾਂ ਆ ਸੁਣਿਆ ਨਾ ਉਪਦੇਸ਼ ਜਿਹੜਾ ਗੁਰਬਾਣੀ ਦਾ ਉਪਦੇਸ਼ ਇਹ ਆਤਮ ਕਥਾ ਸਮਝ ਲਓ ਪਹਿਲਾਂ ਉਹਨਾਂ ਨੇ ਸੁਣਿਆ ਜੀ ਕੇ ਪਾਸ਼ਾ ਕੋ ਉਹ ਬੰਨਿਆ ਮੰਨਿਆ ਦਾ ਅਵਸਥਾ ਬਦਲੀ ਸੰਤੋਖ ਹੋਇਆ ਸਬਦ ਗੁਰੂ ਸੰਤੋਖ ਹੋ ਕੇ ਉਪਜਿਆ ਤੋਖੇ ਉਪਜਿਆ ਫਿਰ ਉਪਜਿਆ ਉਹੀ ਸ਼ਬਦ ਅੰਦਰ ਆਗ ਪ੍ਰਗਟ ਹੋਇਆ ਤਾਂ ਫਿਰ ਉਹਨਾਂ ਨੇ ਗੁਰਬਾਣੀ ਰਚੀ ਆਪਾਰ ਠੀਕ ਹੈ ਮਤੀ ਗੁਰੂ ਨੂੰ ਆਮ ਗੁਰਬਾਣੀ ਚ ਗੁਰ ਨਹੀਂ ਲਿਖਿਆ ਜਾਂਦਾ ਉਪਦੇਸ਼ ਤਾਂ ਗੁਰੂ ਤੋਂ ਹੀ ਆਇਆ ਹੋਇਆ ਬੋਲਿਆ ਬੁਲਾਇਆ ਬੋਲਿਆ ਨਾ ਪੁਰਪਦੇਸ਼ ਹੈ ਗੁਰੂ ਉਪਦੇਸ਼ ਕਿਉਂਕਿ ਗੁਰੂ ਨਾਨਕ ਦੀ ਬਾਣੀ ਵੀ ਹੋਣੀ ਹੈ ਉਹ ਦੀ ਵੀ ਹੋਣੀ ਹੈ ਭਗਤਾਂ ਦੀ ਵੀ ਹੋਣੀ ਹੈ ਹਾਰੀ ਤੇ ਸਮਝਾਇਆ ਹੋ ਗੁਣ ਉਚਰੈ ਹਰ ਹਰ ਹਰ ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਸਭ ਦਿਨ ਸਦਾ ਮੋਹੋ ਚਰੇ ਦਿਨ ਰਾਤ ਲਗਾਤਾਰ ਗਉਣ ਉਚਾਰਨ ਕਰਦੇ ਚਰੇ ਹਰ ਹਰ ਹਰ ਉਰ ਲਿਵ ਹਰ ਹਰ ਹਰ ਫਿਰਦੇ ਜਿਹੜਾ ਜਿਹੜਾ ਉਹਦੇ ਨਾਲ ਜੁੜ ਕੇ ਉਹਦੇ ਨਾਲ ਲਗਾ ਕੇ ਉਹਦੇ ਨਾਲ ਜੁੜ ਜਾਂਦੀ ਹੈ ਲੱਗ ਜਾਂਦੀ ਹੈ ਸਭ ਤਨ ਮਨ ਹਰਿਆ ਹੋਇਆ ਹੋਇਆ ਮਨ ਖੜਿਆ ਹਰਿਆ ਬਾਗ ਤਨ ਮਨ ਫਿਰਦਾ ਵੀ ਹਰਿਆ ਹੋ ਮਨ ਵੀ ਹਰਾ ਹੋ ਗਿਆ ਮਨ ਐ ਖੜ ਗਿਆ ਪੂਰਾ ਤਨ ਮਨ ਹਰਿਆ ਹੋ ਗਿਆ ਪੂਰਾ ਸਦਾ ਪਰਮਾਨ ਜਿਵੇਂ ਹਰਿਆ ਬਾਗ ਹਰਾ ਭਰਾ ਹੋ ਜਾਂਦਾ ਐ ਹੋ ਗਿਆ खट गया मन खुशी हो गई नानक भक्त सदा बगास हो गया ठीक है जी दुख पाप हो गया हां जी अज्ञान मिट गया गुरु चांदण चिराग जन नानक जीवै देख हर इक निमख घड़ी मुख लाग और खत्म हो गया मिट गया और अंधेरा मिट गया कहां से मिट गया ਇਹ ਲੱਗ ਗਿਆ ਹੋਰ ਗਿਆਨ ਹੋਰ ਚਰਨਾਂ ਦਾ ਜਾਨ ਚਰਾਗ ਜਿਹੜਾ ਗੁਰ ਗਿਆਨ ਸੀ ਉਹਨੇ ਗਿਆਨ ਦਿੱਤਾ ਸਤਿਗੁਰ ਨੇ ਜਿਹੜਾ ਗੁਰ ਬਾਣੀ ਗਿਆਨ ਮਿਲਿਆ ਉਹਦਾ ਚਾਣ ਹੋ ਗਿਆ ਜਿਵੇਂ ਹੈ ਗਿਆਨ ਦਾ ਦੀਵਾ ਜਗ ਉੱਠਿਆ ਜਨਾਨਕ ਜੀਵੇ ਦੇਖ ਹਰ ਜਨਾਨਾ ਕਹਿੰਦਾ ਜਿਹੜਾ ਵੀ ਹਰ ਨੂੰ ਦੇਖ ਲੈਂਦਾ ਜਿਹੜਾ ਵੀ ਆਪਣੇ ਮੂਲ ਨੂੰ ਦੇਖ ਲੈਂਦਾ ਦੱਖਣ ਚੱਲਦਾ ਉਹ ਹਮੇਸ਼ਾ ਲਈ ਜੁਟਾ ਹੋ ਜਾਂਦਾ ਇੱਕ ਮਹਤਵਪੂਰਨ ਧੜੀ ਮੁਕਲਾਜ ਇੱਕ ਨਿਮਖ ਧੜੀ ਜਿਹਨੇ ਬੋਨੋ ਹੈ ਅਜੀਵ ਹੈ ਨਾ ਉਹ ਉਹ ਸਮਝੋ ਮੰਨਿਆ ਜਾਂਦਾ ਵੀ ਇਹ ਜਿਉਂਦਾ ਹੈ ਜੇ ਚੁੱਪ ਹੈ ਤਾਂ ਮਰਿਆ ਹੈ ਜੇ ਬੋਲਦਾ ਕਿਰਿਆਨ ਕਰਦਾ ਤਾਂ ਜਿਉਂਦਾ ਜਿਉਣਾ ਸਾਬਤ ਹੁੰਦਾ ਬੋਲੇ ਤੋਂ ਗੁਰਬਾਣੀ ਰਹੀ ਤੋਂ ਸਾਬਤ ਹੋ ਗਿਆ ਵੀ ਇਹ ਜਿਉਂਦਾ ਹੋ ਗਿਆ ਜੇ ਚੁੱਪ ਹੈ ਮਾਨਾ ਚੁੱਪ ਹੈ ਤਾਂ ਉਹ ਹੈ ਮਰਿਆ ਗੁਰ ਬਾਣੀ ਦਾ ਮਾਨਸਿਕ ਪਹੁੰਚਦਾ ਮਰਦਾ ਮੁਕਤੀ ਮਿਲਦੀ ਹੈ ਜਦੋਂ ਪਦਾਰਥ ਦੀ ਨਿਸ਼ਾਨੀ ਹੈ ਗੁਰ ਬਾਣੀ ਰਚਦਾ ਸਿਰ ਤੇ ਜਨਪਦਾਰਥ ਵਾਸਤੇ ਲਿਖਿਆ ਜੀ ਜੀ ਠੀਕ ਹੈ ਕਿਉਂਕਿ ਅਗਿਆਨ ਹਨੇਰਾ ਮਿਟ ਗਿਆ ਇੱਥੇ ਤੱਕ ਤਾਂ ਮਨ ਮਰ ਗਿਆ ਹਾਂ ਜੀ ਹਾਂ ਅਗਿਆਨਤਾ ਚਲੇਗੀ ਤੇ ਜਨ ਨਾਨਕ ਹਾਂ ਮਹੱਲਾ ਤੀਜਾ ਬਿਲਾਵਲ ਤਬਹੀ ਕੀਜੀਐ ਜਬ ਮੁਖ ਹੋਵੇ ਨਾਮ ਰਾਗ ਨਾਦ ਸ਼ਬਦ ਸੋਹਣੇ ਚਾ ਲਾਗੇ ਸਹਜ ਧਿਆਨ ਬਿਲਾਵਲ ਤਬਹੀ ਕੀਜੀਐ ਬਿਲਾਵਲ ਜਦ ਹੋ ਸਕਦਾ ਕੀਤਾ ਜਾਣਾ ਚਾਹੀਦਾ ਜਦ ਮੁਖ ਹੋਵੇ ਨਾਮ ਜੇ ਨਾਮ ਮੁਖ ਤੇ ਹੋਵੇ ਜੇ ਨਾਮ ਹੋਵੇ ਸਤਿਮ ਗਿਆਨ ਬੋਲੇ ਤਾਂ ਹੀ ਬਲਾਵਲ ਸਮਝਿਆ ਜਾਣਾ ਚਾਹੀਦਾ ਹੈ ਮੁਖ ਚ ਨਾਮ ਨਾ ਹੋਵੇ ਤਾਂ ਉਹਨੂੰ ਬਲਾਵਲ ਨਹੀਂ ਕਹਿ ਸਕਦੇ ਬਲਾਵਲ ਬੁਲਾਇਆ ਨਹੀਂ ਬੋਲਦਾ ਫਿਰ ਉਹ ਤਾਂ ਹੀ ਬੋਲਣਾ ਚਾਹੀਦਾ ਜੇ ਮੁਖ ਚ ਨਾਮ ਨਿਕਲੇ ਮੁਖ ਚ ਜਿਹਨੂੰ ਕੋਈ ਨਾਮ ਨਰਾਗ ਨਾਗ ਨਾਜ ਸ਼ਬਦ ਸੋਹਣੇ ਫਿਰ ਉਹਦਾ ਰਾਗ ਵੀ ਸੋਹਣਾ ਹੈ ਉਹ ਜੋ ਸ਼ਬਦ ਬੋਲਦਾ ਉਹ ਵੀ ਸੋਹਣੇ ਨੇ ਜਦਾ ਲਾਗੇ ਸਹਿ ਧਿਆਨ ਜਦੋਂ ਹੈ ਜੇ ਨਸਤਾ ਕੇ ਮਨ ਤੇ ਗਿਆ ਹੋਵੇ ਕਿ ਕਵਾਂ ਨੇ ਚਿੱਤ ਹੋਵੇ ਧਿਆਨ ਤੇ ਗਿਆ ਹੋਵੇ ਔਰ ਕਿਤੇ ਹੋ ਧਿਆਨ ਦੇ ਨਾਲ ਉਹ ਨਾਰਦ ਹੁਣ ਤੇ ਫਿਰ ਚਬਦ ਗੁਰਬਾਣੀ ਚਾਹਣ ਕਰ ਸਾਥ ਹੋਣੇ ਨੇ ਰਾਗ ਨਾਲ ਠੀਕ ਹੈ ਜੀ ਤੇ ਜਿਹੜਾ ਆਮ ਬਿਲਾਵਲ ਰਾਗ ਗਾਇਆ ਜਾਂਦਾ ਹੈ ਇਸ ਸ਼ਬਦ ਚੌਕੀ ਕਹਿੰਦੇ ਆ ਫਿਰ ਉਹਨੂੰ ਇਹ ਸ਼ਬਦ ਚੌਕੀ ਆ ਰਾਗ 나ਦ ਹਰ ਸਿਬੀਏ ਤਾਂ ਦਰਗੈ ਪਾਈਏ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਕਿਉਂਕੇ ਮਨੁ ਭਵਾਨ ਜੇ ਰਾਗ ਤੋਂ ਅਲੱਗ ਹੋ ਰਾਗ ਤੋਂ ਵੀ ਅਲੱਗ ਹੋ ਰਾਗ ਨੂੰ ਧਿਆਨ ਸੰਗ ਕਰੀਏ 나ਦ ਵੀ ਸਾਡੇ ਅੰਦਰ ਪ੍ਰਗਟਨਾ ਹੋਵੇ ਉਹ ਤੋਂ ਇਲਾਵਾ ਫਿਰ ਗੁਰ ਸ਼ਬਦ ਦਾ ਵਿਚਾਰ ਇਹ ਦਈਏ ਖਾਲੀਿਰ ਤੋਂ ਗੁਰਬਾਣੀ ਸਾਡੇ ਕੋਲ ਇਹਨੂੰ ਬਚਾਇੀਏ ਤੇ ਵੀ ਹੈ ਫਿਰ ਵੀ ਕਿਹਦੇ ਨੇ ਤੇ ਦਰਗਾਹ ਮਾਨ ਅੰਦਰ ਗੁਰਦ ਗੁਰੂ ਪਰਗਣ ਨਹੀਂ ਹੈ ਭਾਵੇਂ ਉਹ ਆਰਥਿਕ ਬਾਣੀ ਕਾਚ ਰਹੇ ਭਾਵੇਂ ਉਹ ਰਾਜੇ ਨਹੀਂ ਚੱਲ ਰਹੇ ਪਰ ਆਣ ਪਾਛਾ ਦੀ ਗੱਲ ਕਰ ਰਹੇ ਵਿਚਾਰ ਰਹੇ ਨੇ ਉਹਨਾਂ ਨੂੰ ਜੰਦਰ ਦਰਵਾਜ ਦੇ ਜੀ ਗੱਲ ਨਹੀਂ ਜੀ ਦੇ ਪ੍ਰਗਟ ਹੋ ਗਏ ਉਹ ਤਾਂ ਗੁਰਬਾਣੀ ਜਾਣ ਦੀ ਗੱਲ ਹੈ ਗੁਰਬਾਣੀ ਵਿਚਾਰੇ ਤੋਂ ਵੀ ਲਾਗ ਹੈ ਹੁੰਦਾ ਨਾ ਜੀ ਨਾ ਸ਼ਬਦ ਗੁਰੂ ਪ੍ਰਗਟ ਹੁੰਦਾ ਨਾਲੇ ਆ ਜਾਂਦਾ ਸਾਡੇ ਕੋਲ ਤਾਂ ਹਰ ਸੇਵੀ ਹੈ ਸ਼ਬਦ ਵਿਚਾਰ ਹੈ ਜੀ ਸਾਡੇ ਕੋਲ ਠੀਕ ਹੈ ਇਹ ਸ਼ਰਮ ਗਰਨ ਵਾਲੇ ਚ ਮਾਨ ਮਿਲ ਜਾਂਦਾ ਬਿਲਕੁਲ ਤਾਂ ਤਾਂ ਹੋਊਗਾ ਗਿਆਨ ਹੋਊਗਾ 판 ਟਿਕੂਗਾ ਮਾਨ ਹੋ ਜਾਊਗਾ ਜਾਂ ਨਹੀਂ ਮੰਨੂਗਾ ਤਾਂ ਹਾਂ ਜੀ ਨਾਨਕ ਬ੍ਰਹਮ ਵਿਚਾਰੀਏ ਚੂਕੇ ਮਨ ਬਿਮਾਨ ਨਾਨਕ ਨੇ ਗੁਰਮੁਖਾ ਨੇ ਬ੍ਰਹਮ ਵਿਚਾਰ ਕੀਤਾ ਹੈ ਜਿਹੜਾ ਨੇ ਬ੍ਰਹਮ ਵਿਚਾਰ ਕੀਤਾ ਹੈ ਉਹਨਾਂ ਦਾ ਮਾਨ ਆਰ ਬਿਮਾਨ ਦੋਏ ਜਾਂਦੇ ਰਹਿੰਦੇ ਨਾ ਸੰਸਾਰੀ ਮਾਨ ਦੀ ਲੋੜ ਹੁੰਦੀ ਹੈ ਨਾ ਨਾ ਦੇ ਅੰਦਰ ਹੰਕਾਰ ਹੁੰਦਾ ਸੰਸਾਰੀ ਮਾਨ ਵੀ ਹੰਕਾਰ ਦਾ ਇੱਕੋ ਸਿੱਕੇ ਦੇ ਦੋ ਵੈਲਿਊ ਨੇ ਸੰਸਾਰੀ ਮਾਨਦਰ ਹੰਕਾਰ ਦਾ ਹੀ ਦੂਆ ਨਾ ਕੈਸਾ ਮਨ ਕੈਸਾ ਮਾਨ ਦਰਗਾਹ ਦੇ ਤਿੰਨ ਸੰਸਾਰੀ ਮਾਨ ਨੇ ਅਰਗ ਉਹ ਹਾਨਸ ਕੋਈ ਫਰਤ ਨਹੀਂ ਸਿੱਕੋਈ ਗੱਲ ਉਹ ਡੋਇ ਸੰਸਾਰੀ ਮਾਨ ਵੀ ਛੁੱਟ ਜਾਂਦਾ ਔਰ ਅਹਵਾਨ ਵੀ ਛੁੱਟ ਜਾਂਦਾ ਹੈ ਠੀਕ ਹੈ ਪਰ ਗੁਰਮੁਖ ਹੋ ਕੇ ਵਿਚਾਰ ਨਾ ਬਿਲਕੁਲ ਬੇਟਾ। ਹਾਂਜੀ। ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਸਭ ਤੂੰ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ। ਕੋ ਹਰ ਪ੍ਰਭ ਆਪ ਅਗੰਮ ਹੈ ਸਭ ਤੂੰ ਦੁਪਾਇਆ ਤੂੰ ਆਪ ਦਾ ਅਗੰਮ ਹੈ। ਸਾਰੇ ਸਤਿ ਪ੍ਰਿਜੀ ਤਾਇਓ ਆਪ। ਆਪੇ ਆਪ ਵਰਤਦਾ। ਉਹ ਹਰ ਜਿਹੜਾ ਆਪੇ ਆਬਰਤ ਹੈ ਸਭ ਜਗਤ ਸਵਾਇਆ ਬਾਹਰ ਸੰਸਾਰ ਦੇ ਵਿੱਚ ਤੇਰਾ ਹੁਕਮ ਚੱਲਦਾ ਹੈ ਸੰਸਾਰ ਉੱਤੇ ਹੁਕਮ ਚੱਲਦਾ ਹੈ ਸਾਡੇ ਤੂੰ ਆਪੇ ਤਾੜੀ ਲਾਈ ਆਪੇ ਗੁਣ ਗਾਇਆ ਹਰ ਧਿਆਵੂ ਭਗਤੋ ਸਰਾਤ ਅੰਤ ਲਾਇ ਛਡਾਇਆ ਤੂੰ ਆਪੇ ਤਾੜੀ ਲਾ ਲੈਣਾ ਕਦੇ ਜਦ ਸੰਤੋਖ ਦੀ ਅਵਸਥਾ ਜੁਣਾਣ ਤਾਂ ਤਾੜੀ ਲਾਈ ਹੋਈ ਹੁੰਦੀ ਹੈ ਜਦ ਸਹਜ ਅਵਸਥਾ ਚ ਹੋ ਜਾਣਾ ਫਿਰ ਗੁੰਗਾਵ ਨੇ ਆਪਣੇ ਤਾੜੀ ਲਾ ਲੈਣਾ ਆਪਣੇ ਗੁੰਗਾਵ ਨੇ ਇੱਕ ਦੀ ਗੱਲ ਕੀਤੀ ਹੈ ਇੱਕ ਤਾੜੀ ਵੀ ਲਾ ਲੰਦਾ ਹੈ ਔਰ ਗੁੰਗਾਵ ਨੇ ਵਿਚਾਰਦਾ ਜਦ ਉਪਜਦਾ ਇੱਕ ਉਪਜਦਾ ਗੁੰਗਾਵਨ ਕਰਦਾ ਜਿੰਨਾ ਚ ਤਾੜੀ ਲੱਗੀ ਹੁੰਦੀ ਹੈ ਉਹਨਾਂ ਚ ਇੱਕ ਹੁੰਦਾ ਆਪ ਘਰ ਸਤੇ ਆਵੋ ਫਕਤੋ ਦਨ ਕਰਾਵੇ ਫਕਤੋ ਉਹ ਸਰਦੇ ਵਿਚਾਰ ਉੱਤੇ ਧਿਆਨ ਰੱਖੋ ਦਿਨ ਰਾਤ ਜਿਹਨੇ ਆਪੇ ਛਡਾਉਣਾ ਉਸਨੇ ਛਡਾਉਣਾ ਉਹਦੇ ਨਾਲ ਜੁੜ ਕੇ ਛੁਟਕਾਰਾ ਮਾਇਆ ਤੋਂ ਬੰਨ੍ਹਾ ਰਾਹ ਤੋਂ ਜਿਹਨੀ ਸੇਵਿਆ ਤੇਨੀ ਸੁਖ ਪਾਇਆ ਹਰ ਨਾਮ ਸਮਾਇਆ ਜੇ ਨਾ ਸਰਦੇ ਵਿਚਾਰ ਕੀਤਾ ਜੇ ਸੇਵਿਆ ਸੇ ਸੁਖ ਪਾਇਆ ਉਹਦੇ ਨੂੰ ਸੁਖ ਮਿਲਿਆ ਹਰ ਨਾਮ ਸਮਾਇਆ ਹਰ ਨਾਮ ਮਿਲਦਾ ਕਵਰ ਦਾ ਵਿਚਾਰ ਤਾਂ ਉਹਦੇ ਵਿੱਚ ਹੀ ਸਮਾ ਜਾਂਦਾ ਗੁਣ ਕਾਹ ਗੁਣੀ ਸਭਾ ਬਣਿਆ ਗੁਣ ਗੌਂਦਾ ਗੌਂਦਾ ਗੁਣਾ ਕੇ ਸਮਾ ਜਾਂਦਾ ਠੀਕ ਹਾਂ ਜੀ ਨਾਮ ਸਿਆਰੀ ਨਾਲ ਲਿਖਿਆ ਹਰ ਨਾਮ ਸਮਾਇਆ ਹਰ ਨਾਮ ਦੇ ਵਿੱਚ ਸਮਾ ਜਾਂਦਾ ਸਮਾ ਜਾਂਦਾ ਸਮਾ ਠੀਕ ਹੈ ਜੀ ਇੱਥੇ ਪਹਿਲੀ ਪਾਉਣੀ ਸਮਾਪਤੀ ਜੀ